ਨੀ ਸਰਪੰਚਾਂ ਦਾ ਮੁੰਡਾ ਦੇਖ ਲੈ ਇਹਦੇ ਨਾਲ ਦੇ ਮੰਗੇ ਗਏ ਵਿਆਹੇ ਗਏ ਕਈਆਂ ਤੇ ਜਵਾਕ ਵੀ ਹੋ ਗਏ ਪਰ ਇਹ ਆਉਂਦਾ ਹੁਣ ਤੁਰਿਆ ਫਿਰਦਾ ਨਹੀਂ ਕਾਣ ਮੈਨੂੰ ਤਾਂ ਇਹ ਲੱਗਦਾ ਬਾਹਰ ਕਦੇ ਕਾਂਟੀ ਪਾਈ ਬੈਠਾ ਇਹ ਮਾਈ ਤਾਂ ਇੰਟਰਨੈਟ ਤੇ ਫੋਟੋ ਵੀ ਦੇਖੀ ਹੈ ਤਹਾਰ ਨਹੀਂ ਚਾਚੀ ਕਾਣ ਮਛਰੇ ਮੂਛੇ ਪੰਡ ਦੇ ਮੁੰਡੇ ਵਿਆਹ ਤੇ ਇਹਨਾਂ ਦੇ ਘਰੇ ਘਟੋ ਘਟ ਦਸ ਰਸਤੇ ਲੈ ਕੇ ਗਿਆ ਕੁੜੀ ਵਾਲਿਆਂ ਦੀ ਬਦੂਖੜੀ ਦੇਖ ਕੇ ਭੱਜ ਜਾਂਦੇ ਆ ਯਾਹ ਇਹ ਮੈਨੂੰ ਤਾਂ ਲੱਗਦਾ ਹੈ ਡਿਬਿਊਟ ਜੋ ਘਰ ਆ ਗਿਆ ਇਹ ਡੁੱਡੀ ਦੇਖ ਕੇ ਹੁੱਜੇ ਚੱ ਚੱਤ ਚੱਤ ਛੇ ਤਰੀਕੇ ਆ